श्लोक महला 5 उठंदियां बहनदियां तवंदियां सुख सोए नानक नाम सलाहीए मन तन होए ते सुबह दे हां हो सोई पर ना असल ਸੋਖ ਜਾਨ ਦਾ ਮਹਿਸੂਸ ਕਰਦੇ ਉਹ ਸੋਖ ਬੈਠੇ ਨੂ ਬਣੀ ਉਹ ਸੋਖ ਖੜੇ ਨੂ ਬਣੀ ਜੋ ਸੁੱਤੇ ਰੂ ਸੋਖ ਹੈ ਇਹਦਾ ਵਾਲੀ ਗੱਲ ਹੋ ਗਈ ਪਰ ਮਨ ਮਨ ਕਾਇ ਮਾੜਾ ਫੈਰੀ ਜਾਵੇ ਕਾਇ ਨੋਕ ਜਪੀ ਜਾਵੇ ਕਾਇ ਬਾੜੀ ਬੜੀ ਜਾਵੇ ਮਾਲ ਜਨਾਂ ਜਰੇ ਸੋਨੀ ਨ ਜਾਂਦਾ ਮਾਇਆ ਤੋਂ ਤੇਰੀ ਕੁਲੀ ਛੱਡਦੀ ਦਿੰਦਾ ਸੁਖ ਦੀ ਉਤ ਜਨਾਜ਼ਰ ਪਰ ਕੁੜੀ ਛੱਡ ਕੇ ਮਾਇਆ ਨੂੰ ਛੱਡ ਨਹੀਂ ਦਿੰਦਾ ਮਾਇਆ ਨੂੰ ਭੁੱਲ ਨਹੀਂ ਜਾਂਦਾ ਜਨਾਜ਼ਰ ਵਾੜਾ ਉਹਨਾਂ ਜਰ ਬੇਲਦਾ ਜਨਾਜ਼ਰ ਮਾਇਆ ਯਾਦ ਚਲਾਉਣ ਵਾਸਤੇ ਪਾਣੀ ਉਹਨਾਂ ਜਰ ਪੜਦਾ ਹੈ ਮਾਇਆ ਭੁੱਲ ਜਵੇ ਇਹ ਸਭ ਭੁੱਲਣ ਵਾਸਤੇ ਕਰਦਾ ਜਾਂ ਭੁੱਲ ਗਿਆ ਸੁਖ ਤਾਂ ਜਾਂਦਾ ਹੈ ਛੁੱਗ ਗਿਆ ਭੁੱਲ ਗਿਆ ਭੁੱਲ ਗਿਆ ਸੁਖ ਹੈ ਜਿੰਨਾ ਜਰ ਮਾਇਆ ਯਾਦ ਏ ਤੇ ਸਾਹਮਣੇ ਹੈ ਉਦੋਂ ਡਰਦਾ ਮੌਲਾ ਫੇਰਦਾ ਇਹ ਤੋਂ ਘਿਹੜਾ ਜਨਾਮਾ ਛੱਪੜੀ ਤੋਂ ਪਾਣੀ ਵੀ ਤਾੜੀ ਪੜਦਾ ਇਹ ਭੁੱਲ ਜਵੇ ਇਹ ਗੁੱਡੀ ਛੁੱਟ ਜਵੇ ਸਭ ਕੁਝ ਤਾਂ ਕਰਦਾ ਔਰ ਜਸ ਸੋਝਵੇ ਤਾਂ ਪੜਦਾ ਫਿਰ ਉਹ ਨਾ ਮੌਲਾ ਫੇਰਦਾ ਉਹ ਨਾ ਕੋਈ ਲੰਗਰ ਨਾ ਕਰਦਾ ਕੁਛ ਨਹੀਂ ਕਰਦਾ ਔਰ ਜੋ ਹੋਣਾ ਹੈਗਾ ਕਾਮ ਕੋਈ ਨਹੀਂ ਕਰਦਾ ਸੁਖ ਹੈਗਾ ਠੀਕ ਹੈ ਜੀ ਦਾ ਮੋਟਾ ਜਿਹਾ ਪੀ ਕੇ ਸੁਖ ਨਾਮ ਚਲਾਈਏ ਨਾਨਕ ਕਹਿੰਦਾ ਜੇ ਨਾਮ ਦੀ ਵਡਿਆਈ ਕਰੀਏ ਨਾ ਨਾਮ ਦੀ ਇਹ ਨਾਮ ਦੀ ਵਡਿਆਈ ਕਰੋਗੇ ਕਿਸੇ ਆਦਮੀ ਦੀ ਵਿਅਕਤੀ ਦੀ ਕੋ ਵਡਿਆਈ ਨਹੀਂ ਕਰ ਸਕਦੇ ਜਿਨ੍ਹਾਂ ਨੇ ਬਾਣੀ ਰਚੀ ਹੈ ਅੱਧੀ ਕੀ ਕਰਦੇ ਆ ਜਿਹਨਾਂ ਨੇ ਬਾਣੀ ਰਚੀ ਉਹਨਾਂ ਦੀ ਵਡਿਆਈ ਕਰਨ ਲੱਗੇ ਅੱਖ ਨਹੀਂ ਮਿਲਿਆ ਕਿ ਇਹਨੂੰ ਨਾ ਮਿਲੂਗਾ ਬਿਲਣਾ ਵੀ ਕੱਖ ਦੀ ਜੋ ਲਾਈ ਜਾਣ ਇਹ ਜਿਹੜੇ ਬਾਣੀ ਘਾੜਿਆਂ ਦੀ ਵਡਿਆਈ ਕਰਨਗੇ ਉਹਨਾਂ ਨੂੰ ਕੱਖ ਨਹੀਂ ਮਿਲੂ ਤਿੰਨਾਂ ਵਾਰੀ ਜੀ ਉਲਾ ਲੈਣੇ ਠੀਕ ਹੈ ਬਿਲੂ ਉਹਨਾਂ ਨੇ ਕਿਹਾ ਬਾਣੀ ਘਾੜਿਆਂ ਨੇ ਜੋ ਉਹਨਾਂ ਨੇ ਕਿਹਾ ਜਦ ਉਹ ਕੰਮ ਕਰਾਂਗੇ ਤਾਂ ਸਭ ਬਿਲੂਆ ਦੀ ਸੁੱਖ ਦੀ ਬਿਲੂ ਮਾਇਆ ਦਾ ਗਲੂਗੀ ਉਹਨਾਂ ਨੇ ਵढਾਈ ਗਲਤ ਹੈ ਮਾਇਆ ਦਾ ਗੁਰਦੁਆਰੇ ਜਿਆਦਾ ਆਊਗੀ ਜਿੱਦਣ ਵढਾਈ ਉਹਨਾਂ ਦੀ ਛੱਡ ਦਿੱਤੀ ਨਾ ਇਹਨਾਂ ਨੇ ਗਲਤੀ ਮਾਇਆ ਘਟ ਜੂਗੀ ਘਟ ਜੂਗੀ ਮਾਇਆ ਲੋੜ ਨਹੀਂ ਰਹੀ ਫਿਰ ਇੱਕ ਦੂਆ ਦੀਆਂ ਪੱਗਾਂ ਨਾਲ ਵੀ ਅਰ ਜਾਣਗੇ ਮਾਇਆ ਘਟ ਗਈ ਉਠੰਦਿਆਂ ਬਹੰਦਿਆਂ ਸਬੰਧਿਆਂ ਇਹ ਬਾਹਰਲੇ ਸਰੀਰ ਕਰਕੇ ਆ ਬਹਲੇ ਉੜਦੇ ਬੈਨ ਨੇ ਆਹ ਉਹੋ ਉੜਦੇ ਬੈਨ ਦੇ ਵੀ ਮਾਲਾ ਹੱਥੇ ਰੱਖਦੇ ਨੇ ਸੰਤ ਅੱਛਾ ਜੀ ਦੇਖਦੇ ਹੋ ਡਰਾਮੇ ਬਾਜੀ ਇਹਨਾਂ ਦੀ ਆਪਾਂ ਨੇ ਜੋੜੀ ਗੱਲ ਧਰਮ ਕਾਦਮੀ ਨਾਲ ਆਇਆ ਇਹ ਕਈਆਂ ਦੇ ਮਨ ਫਿਰੀ ਜਾਂਦਾ ਜਾਂ ਸੌਂ ਜਾਂਦਾ ਨੇ ਜਾਂ ਖੜ ਜਾਂਦਾ ਐ ਨੀ ਲਗਦਾ ਵੀ ਤਿੰਨੇ ਚੀਜ਼ਾਂ ਉਠੰਡੀਆਂ ਬੰਦੀਆਂ ਸੰਬੰਧਿਆਂ ਸੁਖ ਹੋਏ ਤਿੰਨੇ ਕਰਦਿਆਂ ਦੇ ਹਮੇਸ਼ਾ ਹੀ ਉਹਦੇ ਸੁਖ ਰਹਿੰਦਾ ਨੇ ਨਾਮ ਨੂੰ ਸਲਾਇਆ ਇਸ ਤਰ੍ਹਾਂ ਕਹਿਣਾ ਵੇ ਵੀ 200 ਕੱਢ ਹਾਂਜੀ ਬਈ ਉਹ ਨੂੰ ਸੋਗਾ ਹੂੰ ਹੂੰ ਉੱਠੀ ਜਾ ਬੈਠੀ ਜਾ 500 ਵਾਰ ਫਿਰ ਉਹ ਨੂੰ ਸੋਗਾ ਘੜਦਾ ਡੰਡਾ ਬਾਂਦਦਾ ਕਿਤੇ ਤੇ ਸੋਗਾ ਨਹੀਂ ਹੈ ਅੱਛਾ ਜੀ ਬਾਜਰੋਂ ਸੰਬੰਧੇ ਆ ਤਾਂ ਹੀ ਸੋਗਾ ਸੋਗ ਸੁਬੰਧ ਦੇ ਬਣਾਦੀ ਠੀਕ ਜਿੰਦ ਦੇ ਭਾਨ ਦਾ ਕਲਪਨਾ ਚਲਦੀ ਹੈ ਅੰਦਰ ਮਾਇਆ ਦੀ ਇੱਛਾ ਚਲਦੀ ਹੈ ਨਾ ਠੀਕ ਹੈ ਤੁਪੰਧਿਆ ਨੇ ਵਿੱਚ ਰੋ ਗਿਆ ਹੋ ਮੰਨ ਰੁਕ ਗਿਆ ਉਹ ਸੰਬਦੇ ਦੇ ਵਿੱਚ ਮਨ ਰੁਕ ਗਿਆ ਹੁਣ ਉਹ ਕਲਪਦਾ ਨਹੀਂ ਹੈ ਠੀਕ ਹੈ ਅਗਲੀ ਅਗਲੀ ਪੰਕਤੀ ਚ ਦੱਸਿਆ ਫਿਰ ਨਾਨਕ ਨਾਮ ਸਲਾਹੀਏ ਮਨ ਤੰ ਸ਼ੀਤਲ ਹੋਏ ਕਿਉਂਕਿ ਫਿਰ ਉਹ ਆਉਂਦਾ ਹੈ ਜੀ ਫੇਰ ਜੋ ਸੁਖ ਪੂਰਾ ਨਹੀਂ ਹੈ ਉਹ ਵੀ ਉਹ ਵੀ ਕੱਪਦੇ ਨਹੀਂ ਹੈ ਸੋਕੋ ਤਾਂ ਆਂਦਿਆਂ ਤੋਂ ਪਰਮਾਨੰਦ ਹੈ ਜੋ ਜਿਵੇਂ ਕੋਈ ਬਿਮਾਰ ਹੈ ਮਰੀਜ਼ ਹੈ ਥੋੜਾ ਜਿਹਾ ਜਦੋਂ ਦੀ ਅੱਖ ਲੱਗ ਜਾਏ ਮਿਲ ਆਇਆ ਵੀ ਕਹਿੰਦਾ ਕਹਿੰਦਾ ਭਾਈ ਉਹਨਾਂ ਨੂੰ ਬੁਲਾਉਣਾ ਨਹੀਂ ਮਸਾਂ ਅੱਖ ਲੱਗੀ ਜਿਨ੍ਹਾਂ ਜਿਹੜਾ ਅੱਖ ਲੱਗ ਜਾਂਦੀ ਹੈ ਸੋਕੋ ਨੂੰ ਹੁੰਦਾ 40 ਦਿਨ ਦੀ ਜੇ ਐ ਘਾਬ ਕਰਦਾ ਡਾਕਟਰ ਨੇ ਟੀਕਾ ਲਾ ਦਿੱਤਾ ਚਾਹੇ ਕੋਈ ਗੋਲੀ ਦੇ ਦਿੱਤੀ ਥੋੜੀ ਦੌਰਾਸਤੇ ਉਹਨੂੰ ਨੀਂਦ ਆ ਗਈ ਮਿਲ ਲਵੀ ਗਏ ਹੋ ਕਹਿੰਦੇ ਚੁੱਪ ਖੜਕਾਣਾ ਕਰੋ ਬੈਠੇ ਰਹੋ ਜਾਂ ਉੱਠੋ ਆ ਫਿਰ ਮਿਲ ਲਿਓ ਸੁੱਖ ਭੁੱਲਿਆ ਹੋਇਆ ਸੁਬੰਦੇ ਆਸੁਖ ਹੋਏ ਨਾਨਕ ਨਾਮ ਸਲਾਹੀਏ ਮਾਨ ਤਨ ਸੀਤਲ ਹੋਏ ਇਸ ਕਰਕੇ ਨਾਮ ਨੂੰ ਸੁਲਾਉਣਾ ਚਾਹੀਦਾ ਹੈ ਕਿਉਂਕਿ ਹੈ ਜੇ ਹੋਇਆ ਜੁੜਿਆ ਹੋਇਆ ਸੁਤਿਆ ਹੋਇਆ ਹੋ ਕਦੋਂ ਜਿੰਨਾ ਚਿਰ ਜਾਗਦਾ ਰਹੇ ਜਾਂਦਾ ਜਾਉਂਦਾ ਮੈਂ ਹੁਕਮ ਹੁਕਮ ਤਗਰਾਂ ਦੇ ਸੰਕੇਤਾਂ ਕੇ ਸੇ ਤਿਆਗ ਕਰ ਰਹਾ ਹਾਂ ਪਰ ਹੁਕਮ ਦੇ ਖਿਲਾਫ ਦਖਲ ਸ਼ੁਰੂ ਕਰ ਦਿੰਦਾ ਉੱਠਦੀ ਸਾਰੇ ਬਾਕੀ ਸਾਰੇ ਸੁਤਾ ਪਿਆ ਬਾਗੀ ਹੈ ਘਟੋਕਰ ਬਾਗੀ ਤਾਂ ਨਹੀਂ ਸੁਤਾ ਪਿਆ ਕੀ ਬਾ ਮਨ ਤਨ ਸੀਤਲ ਹੋਏ ਹਿਰਦਾ ਤਾਂ ਫਿਰਦਾ ਬੋਲ ਹੈ ਗਈ ठीक है जी मोहल्ला पांचवा लालच अट्या नित फिरै स्वार्थ करे न कोई जिस गुरु भेटे नानका तिस मन बसया सोई लालच अट्या अट्या हुंदा दूध दा दूधा भाटा को ज्यादा भसदीया बोरी अच्छा जी आटे दी पूर बनोवे जो ना होवे अट्ठी गई अट्या ऊपर दी दूध ਅਛਾ ਲਾਲ ਚਟਿਆ ਫਿਰੇ ਅਟਿਆ ਦਰਦਰੇ ਨਹੀਂ ਲਾਲ ਚੋਤੇ ਦੀ ਦੁਲਦਾ ਫਰਦਾ ਲਾਲ ਚ ਸਵਾਰਥ ਕਰੇ ਨਾ ਕੋਈ ਸਵਾਰਥ ਕੋਈ ਕਰਦਾ ਸਵਾਰਥ ਦਾ ਰੂਤ ਨਾ ਆਪਣੇ ਕੰਮ ਆਉਣ ਆਣਾ ਆਪਣੀ ਆਤਮਾ ਵਾਸਤੇ ਕੁਝ ਨਹੀਂ ਕਰਦਾ ਸਵਾਰਥ ਦਾ ਇਥੇ ਅਰਥਾਤ ਮਨ ਸਵਾਰਥ ਅਸਦੋ ਕੋਈ ਦਾਸ ਆਤਮਾ ਦੇ ਵਾਸਤੇ ਅੱਪਾ ਆਤਮਾ ਨੂੰ ਭੁੱਲ ਕੇ ਸਰੀਰ ਨੂੰ ਜੋ ਆ ਆਤਮਾ ਨੂੰ ਤਿਆਰ ਕਰਕੇ ਸਰੀਰ ਕੋ ਲੋੜ ਅਨੁਸਾਰ ਮਨਮੁਖੀ ਬਣ ਗਈ ਉਹ ਮਨਮੁਖੀ ਨੇ ਅਰਥ ਹੈ ਤੋਹਮ ਦੇ ਤੇ ਅਵਰ ਕਾਇ ਤੇਰੇ ਕੇ ਤੇਨਾ ਕੰਮ ਤੇਰੇ ਤੇ ਤੇਰੇ ਕੰਮ ਐ ਉਹ ਦਾਰਤਾ ਤੇਰੇ ਨਾਗ ਇਹ ਤੇਰੇ ਦਾ ਕੰਮ ਫਾਰਸਲਾ ਵੀ ਮਾਰਾ ਨਹੀਂ ਹੈ ਫਾਰਸ ਦੇ ਨਾਲ ਪਰਮਾਰਥ ਆਇਆ ਇੱਕ ਦੂਰੇ ਖਿਲਾਫ ਨਹੀਂ ਹੈ ਕਾਇ ਸੰਸਾਰੀ ਬੋਲੀ ਕਿ ਗੱਲ ਫਾਰਸ ਪਰਮਾਰਥ ਤੋਂ ਗੱਲ ਕਹੀ ਦੀ ਸਿਆਸਤਾਂ ਉਹ ਸਿਆਸਤਾਂ ਐਂ ਚਲਦੇ ਦੁਨਿਆਵੀ ਬਾਸ਼ਾਤੀ ਸਾਰੀ ਪਰਮਾਰਥ ਦਾ ਕੋਈ ਨਹੀਂ ਪਰਮਾਰਥ ਜਪੜਾਂ ਪਰਮਾਰਥ ਜਪੜਾਂ ਸਵਾਰਥ ਜਪੜਾਂ ਆਪ ਜਪਾ ਮੇਰਾ ਸਭ ਰਹਾ ਨਾਮ ਦੀ ਬਾਤ ਜੋਏ ਨਬ ਕੀ ਬੋਲੀ ਦੇ ਇੱਥੋਂ ਆ ਕੇ ਬੋਲੀ ਦਾ ਫਰਕ ਪੈ ਕੇ ਅਲ ਜਾਂਦੀ ਹੈ ਤਾਣੀ ਇਹ ਜਈ ਬ੍ਰਹਮ ਤਾਣੀ ਅਲ ਦੇ ਫਰਕ ਹੋ ਜਾਂਦੇ ਹਾਂ ਕਿ ਇਹ ਵੀ ਆਉਂਦਾ ਹੈ ਇਹੀ ਅੱਖਰ ਜਿਵੇਂ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚੇਤਾਵਸ 파ਰਵਰਮਤ નિਸ਼ਚਲ ਹੋਵੇ ਰਾਜ ਇੱਥੇ ਸਾਬੀ ਅੱਛੇ ਭਲਾ ਕੰਮ ਨਹੀਂ ਕਰ ਰਿਹਾ ਇਹ ਆਪਣੇ ਸਵਾਲ ਵਾਸਤੇ ਹਾਂਜੀ ਸੋ ਬੈ ਜੀ ਮੇਰੇ ਸਾਹਮਣੇ ਐਸਾ ਸਵਾਰਥ ਕਰੇ ਜਿਹਦੇ ਆਪਣਾ ਸਿਮਰੇ ਤੇ ਇਸ ਤਰ੍ਹਾਂ ਹੀ ਆਉਂਦਾ ਹੈਗਾ ਨਾਨਕ ਕੈ ਮਨ ਇਹ purkarth ਪ੍ਰਭੂ ਹਮਾਰਾ ਸਾਰੇ ਸਵਾਰਥ ਹਾਂ purkarth ਹੈ purcharth ਹੈ ਨਾਨਕ ਕੁਝ ਦੇਣਾ ਚਾਹੁੰਦਾ ਹੈ ਪ੍ਰਭੂ ਹਮਾਰਾ ਸਾਰੇ ਸਵਾਰਥ ਕੁਝ ਵੰਡਾਉਣਾ ਚਾਹੁੰਦਾ ਕਿਸੇ ਲੋਕਾਂ ਨੂੰ ਪਰਮਾਰਥ ਕਰਨਾ ਚਾਹੁੰਦਾ ਹੈ ਪਰ ਤਾਂ ਗੁਰੂ ਜੀ ਸਵਾਰਥ ਪੂਰਾ ਕਰੇ ਹੋ ਮਰਤ ਮੇਰਾ ਇਹ ਹੈ ਕਿ ਮੈਂ ਵੱਡਣਾ ਚਾਹੁੰਦੋ ਕੋਸ ਦਾ ਪੂਰਾ ਤੂਰ ਨਾਮ ਤੂਰ ਦੇ ਵੱਡੂਗਾ ਨਾਮ ਕੋਈ ਆਗੀ ਠੀਕ ਹੈ ਜੀ ਜੀ ਲਾਲਚ ਅਟਿਆ ਦਿੱਤ ਫਰੇ ਸਵਾਰਤ ਕਰੇ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਈ ਜਿਹੜਾ ਆਪਣੇ ਸਤਗੁਰ ਦੇ ਨਾਲ ਇੱਕ ਹੋ ਜਵੇ ਇੱਕ ਵਾਂਗ ਇੱਕ ਜਿੱਤ ਹੋ ਜਵੇ ਜਿਹੜਾ ਆਦਮੀ ਜਿਸ ਕੋ ਭੇਟੇ ਨਾਨਕਾ ਜਿਹੜਾ ਇਕਮਾਨ ਇਕਚਿਤ ਹੋ ਜਵੇ ਉਹਦੇ ਮਨ ਵਿੱਚ ਵੱਸ ਜਾਵੇ ਜਦੋਂ ਇੱਕ ਸਰਮਾਨ ਇਕਮਨ ਇਕਚਿਤ ਹੋ ਕੇ ਸਾਚ ਨੂੰ ਅੱਧੀ ਅਵੇਲੀ ਦਾ ਹੈਗੀ ਆ ਇੱਕ ਭਾਈ ਦੀ ਅੱਧੀ ਅਵੇਲੀ ਹੈ ਉਹ ਭਾਈ ਦੀ ਦੌਰ ਸਾਹਿਬ ਦੀ ਠੀਕ ਹੈ ਤਾਂ ਗੰਗਾ ਅੱਧੀ ਅਵੇਲੀ ਇਹ ਛੋਟਾ ਸੀ ਕਮਜ਼ਾ ਸੀ ਬੜੇ ਦਾ ਉਹ ਸੀ ਕਮਜ਼ੋਰ ਉਹ ਕਮਜ਼ੋਰ ਕਹਿੰਦਾ ਜੀ ਮੇਰੇ ਆਲੀ ਅੱਧੀ ਲੈ ਲਓ ਮੈਂ ਲੈ ਆ ਬਈ ਚਾਬੀ ਅਰ ਚਾਬੀ ਕਿਵੇਂ ਨਾ ਦਿੰਦਾ ਉਹ ਕਹਿੰਦਾ ਤੂੰ ਆਪਣੀ ਅੱਧੀ ਰੱਖ ਲੈ ਅੱਧੀ ਚੱਲਣਾ ਤੇ ਅੱਧੀ ਜਾਂਦੇ ਹੀ 40 ਦਾ ਸਿੱਧੇ 400 ਆਦੀ ਬਟੇ ਰਹਿ ਜਾਈ ਜਾਂਦਾ ਸੀ ਉਹਨਾਂ ਜਿੰਨ ਸਾਰੀ ਪਹਿਲੀ ਜਾਂਦਾ ਸੀ ਫੇਰ ਉਹਨੇ ਵੀ ਕਹਦਾ ਕਨਾਂਜੀ ਗੱਲ ਸਾਰੀ ਫੇਰ ਆਪ ਵੀ ਅੰਦਰੇ ਚਲਾ ਗਿਆ ਸਾਨੂੰ ਪਤਾ ਵੀ ਜਾਂ ਅੰਦਰੇ ਜਾ ਆਪਣੇ ਨਾਮ ਦਾ ਨਾ ਸ਼ਾਮ ਹੋਣ ਫਿਰ ਤੇ ਕਬਜਾ ਹੁੰਦਾ ਪੂਰੇ ਤੇ ਕਬਜਾ ਨਹੀਂ ਹੁੰਦਾ ਅੱਠਾ ਵੀ ਦੇਤੀ ਸਾਰੀ ਤੇ ਕਬਜਾ ਹੋ ਗਿਆ ਫਿਰ ਹਾਂਜੀ ਪੌੜੀ ਸਬੇ ਵਸਤੂ ਕੌੜੀਆਂ ਸੱਚੇ ਨੋਂ ਮਿੱਠਾ ਸਵਾਦ ਆਇਆ ਤਿੰਨ ਹਰ ਜਨਾ ਚਖ ਸਾਦੀ ਡਿਠਾ ਹਰ ਨਾ ਮਿੱਠਾ ਐ ਸਾਰੀਆਂ ਵਸਤਾਂ ਕੌੜੀਆਂ ਨੇ ਕਾਲਾ ਵਗਾਲਨਾ ਕਹਿੰਦੇ ਕਹਿੰਦਾ ਮਿੱਠੇ ਨੇ ਗੁਰਬਾਣੀ ਕਹਿੰਦੀ ਸਭੇ ਵਸਤਾਂ ਕੌੜੀਆਂ ਆਲਾ ਨਾ ਮਿੱਠਾ ਪਤਾਸੇ ਫਿਰ ਮਿੱਠੇ ਤੇ ਗੁਰਬਾਣੀ ਦਾ ਬੱਠੇ ਮੰਦੀ ਨਹੀਂ ਉਹਨਾਂ ਨੂੰ ਪਤਾਸੇ ਤਾਂ ਮਿੱਠੇ ਨਹੀਂ ਸੀ ਐ ਜੇ ਵਿਦਵਾਨ ਤੇ ਮੈਸ਼ਨਰੀ ਇੰਨੇ ਕਿ ਜੁਗ ਗਈ ਤੇ ਜਿਦਾ ਜਿਦਾ ਥਪੜਾਈ ਕਰ ਰਹੀ ਹੈ ਬਾਣੀ ਇਹਨਾਂ ਦੀ ਲੋਕਾਂ ਨੂੰ پتہ ਹੋਸ਼ ਹੋਣ ਆਈ ਅਸਲ ਚ ਤੁਸੀਂ ਕੀ ਪੜਾਉਂਦੇ ਤੇ ਕਿੰਨੀ ਗੱਤਾਂ ਨੂੰ ਚੱਲਦੀ ਆਂ ਨੂੰ ਜੇ ਨਹੀਂ ਸੀ ਕੋਈ ਪਤਾ ਤੁਹਾਡੇ ਨਾਲ ਵੀ ਗਾਹਾਂ ਨੇ ਤੁਹਾਡੇ ਨਾਲ ਵੀ ਦਿਲਤੇ ਚਲੋ ਇਹ ਬੋਲਣ ਦੇ ਹੋ ਉਹ ਅਗਾਲਤਾ ਉੱਤੇ ਬੈਠੇ ਨੇ ਹੁਣ ਬੈਠੇ ਆ ਪਹਿਲਾਂ ਤੁਹਾਡੇ ਨਾਲ ਵੀ ਡੀਲ ਹੋਈ ਇਹ ਗੱਲ ਤਾਂ ਚਲੋ ਬੰਦੀ ਜਾ ਸਕਦੀ ਹੈ ਨੇ ਤਾਂ ਗੱਲ ਦੇਖਣੀ ਤੁਸੀਂ ਕੀ ਕੀਤਾ ਤੁਸੀਂ ਬਣ ਕੇ ਅਸਤ ਕੀ ਕੀਤਾ ਪਬਲਿਕ ਨੂੰ ਉਹ ਅਗਾਲ ਤੱਕ ਤੇ ਨਹੀਂ ਬੈਠਾ ਉਹ ਪਬਲਿਕ 'ਚ ਬੈਠਾ ਹੈ ਵਿੱਚ ਸੰਪਤਾਰ ਪਰ ਬਸਤੇ ਜੀਓ ਅਸੀਂ ਸੰਦਰ ਨਾਲ ਕਰ ਰਹੇ ਹਾਂ ਕਾਲ ਅਗਾਲ ਤੱਕ ਨਾਲ ਥੋੜੀ ਗੱਲ ਹੈ ਨਾਲ ਕਾਲ ਤਖਤ ਇਹਨਾਂ ਨੇ ਬਣਾਇਆ ਹੋਇਆ ਜਿੱਤੇ ਹੋਰ ਬਣਾ ਲਓ ਜਿੱਤੇ ਮਰਜੀ ਬਣਾ ਲਓ ਤੁਸੀਂ ਖਾਲਸੇ ਦੀ ਬੁਰਜੀ ਹੈ ਜੇ 100 ਕਾਲ ਤਖਤ ਬਣਾ ਲਵੇ ਤਾਂ ਬਾਅਦ ਹੈ ਸਿੱਖਾਂ ਦੀ ਤਾਕਤ ਵਧੂਗੀ ਕਾਲ ਤਖਤ ਕੋਈ ਵਧਾਉਣਗੇ ਤੱਬੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ ਜਿਹਦਾ ਨਾਮ ਮਿੱਠਾ ਸਰਬੋ ਉਹ ਪਰ ਇਹ ਤਾਂ ਮਿੱਠਾ ਨਹੀਂ ਜਿਹੜਾ ਜੀਬ ਨੂੰ ਮਿੱਠਾ ਲੱਗੇ ਗੱਲ ਤਾਂ ਇਹ ਉਹ ਸਾਜ ਨੂੰ ਕੌੜਾ ਕਹਿੰਦੀ ਹੈ ਦੁਨੀਆਂ ਵਾਸਤੇ ਸੱਚ ਕੌੜਾ ਹੈ ਨੂੰ ਸੱਚ ਮਿੱਠਾ ਲੱਗਦਾ ਜਿਹੜਾ ਬੋਲ ਰਿਹਾ ਹੈ ਪੰਜ ਪਾਸ਼ਾ ਕਹਿ ਰਿਹਾ ਮਿੱਠਾ ਹੈ ਸਭੇ ਬਸਾਂ ਕੌੜੀਆਂ ਦੁਨੀਆਂ ਕਹਿ ਰਹੀ ਹੈ ਪਤਾ ਮਿੱਠੇ ਦੇ ਉਹ ਕਹਿ ਰਿਹਾ ਵੀ ਸਭੇ ਬਸਾਂ ਕੌੜੀਆਂ ਨੇ ਇੱਕ ਪਾਸੇ ਉਹ ਖੜਾ ਹੈ ਇੱਕ ਪਾਸੇ ਸਾਰੀ ਦੁਨੀਆਂ ਖੜੀ ਹੈ ਇਹਦਾ ਉਹ ਬੋਲੀ ਹੈ ਬੋਲੀ ਦੇ ਟੱਪ ਕੇ ਹਰ ਸਾਰੀ ਪੁੱਛਿਆ ਕਾਲਜਾਂ ਸਕੂਲਾਂ ਤੁਸੀਂ ਭਾਸ਼ਾ ਪੜ੍ਹੀ ਸੀ। ਸਕੂਲਾਂ ਜੇ ਭਾਸ਼ਾ ਹੀ ਨਹੀਂ ਪੜ੍ਹੀ। ਤੁਸੀਂ ਕੇ ਦੇ। ਆਪੇ ਆਪੇ ਵਿਦਵਾਨ ਬਣ ਕੇ ਤੇ ਚਿੱਤਰ ਤਾਂ ਫੇ ਖਾਣੇ ਹੀ ਸੀ, ਵੇਚੀ ਤਾਂ ਕਰਾਉਣੀਆਂ ਸੀ। ਤੋ ਆਦਾਇ ਤਿੰਨ ਹਰ ਜਨਾ ਚਖ ਸਾਦੀ ਦਿੱਤਾ। ਨੇ ਜਖ ਕੇ ਇਠੈ ਲਾ ਨੇ ਉਹ ਨਾਲ ਹੋਏ ਸਵਾਦ ਆਇਆ ਵੀ ਹਮ ਵਾਕਿਆ ਹੀ ਬਿਠਾ ਕੋੜੀ ਉਹਨੇ। ਠੀਕ ਹੈ। ਸਾਦ ਆਇਆ ਤੇ ਨਾ ਹਰ ਜਨਾਂ। ਕਾਹੋਂ ਆਇਆ? ਚੱਕ ਸਾਚ ਜੀਣਾ ਸਵਾਦ ਚੱਖਿਆ। ਸੱਚ ਦਾ, ਅਰਚੂਰ ਦਾ। ਚੂੜਦੇ ਸਵਾਦ ਦਾ ਪਤਾ ਇੱਥੇ ਹੀ ਫਿਰ ਜਦ ਦੇ ਫਸਿਆ ਤਾਂ ਕੋੜ ਤੇ ਕੋੜਾ ਤਾਂ ਸਮਾਂ ਮਗ ਨਿਕਲ ਨਹੀਂ ਆਂਦਾ ਭਾਪ ਸਾ ਦਿੰਦਾ ਤਾਂ ਬਿਠਾ। ਔਰ ਬਿਟਾਰ ਕੌਲਾ ਜੀ ਨੂੰ ਲੱਗਦਾ ਠੀਕ ਹੈ ਸਾਦੀ ਜਿੱਠਾ ਪੜਨਾ ਸਾਦੀ ਹੀ ਸਾਧਾਨ ਹੈ ਦਾਨੀ ਹੈ ਅਦੇ ਹੋਏ ਜਿਹੜੇ ਮਹਿਮਾਨਾ ਸਦੇ ਆਣੇ ਰੱਖੇ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਬੁੱਠਾ ਪਾਰ ਬ੍ਰਹਮ ਜਿ세 ਲਿਖਿਆ ਜਿਹਦੇ ਤੇ ਪਾਰ ਬ੍ਰਹਮ ਨੇ ਆਪਣੇ ਹੱਥ ਆਪਣੇ ਹੱਥ ਨਾਲ ਕਲਮ ਕਲਮ ਗਿਆ ਹੁਕਮ ਹਾਥ ਆਪਣੇ ਹੱਥ ਦੀ ਉਂਗਲੀ ਨਾਲ ਲਿਖ ਦਿੱਤਾ ਉਹਦੇ ਹੁਕਮ ਹਾਥ ਕਹੋ ਕੌਣ ਵੇਖ ਸਕਦਾ ਉੱਥੇ ਉਹ ਲਿਖਿਆ ਅੰਦਰ ਉਹ ਇਸ਼ਾਰਾ ਹੀ ਦਿੱਤਾ ਠੀਕ ਹੈ ਜੀ ਮਨ ਤਿਸੇ ਵੁਠਾ ਉਹ ਪਤਾ ਲੱਗਿਆ ਉਹਨੂੰ ਐਵੇਂ ਲੱਗਿਆ ਪਤਾ ਸੁਣੇ ਸਾਰੇ ਗੱਲਾਂ ਦਾ ਪਤਾ ਲੱਗਦਾ ਸਾਰੀ ਦੁਨੀਆ ਨੂੰ ਭੇਜਾ ਵਰਤ ਕੌਣਾ ਹੈ ਉਬਰ ਤੇ ਮਿਠਾ ਵੇਖਿਆ ਕੌੜੀ ਹੈ ਦੇਖਾਂ ਭਲਾ ਕਿੰਨਾ ਕਿੰਨਾ ਕਮਲ ਲੈਣਗੇ ਕੌੜਾ ਪਤਾ ਸਭੂ ਜ ਫਿਰ ਬ੍ਰਹਮ ਜਦ ਛੁਟਾ ਸਪਰਸ਼ ਕਰਦਾ ਨਾ ਸਪਰਸ਼ ਕਰਦਾ ਫਿਰ ਦੇਨੂੰ ਪਰਸਦਾ ਦਰਸ਼ਨ ਪਰਸੀਏ ਗੁਰੂ ਕੇ ਤਾਂ ਮਠਾ ਕੌੜੇ ਦਾ ਪਤਾ ਲੱਗਦਾ ਉਹ ਤੋਂ ਪਹਿਲਾਂ ਨੀ ਲੱਗਦਾ ਬਿਲਕੁਲ ਵੀ ਉਹ ਤੋਂ ਪਹਿਲਾਂ ਤਾਂ ਸੁਣੀ ਸੁਣੀ ਗੱਲਾਂ ਨੇ ਜਾਂ ਦਰਸ਼ਨ ਹੋਇਆ ਦਰਸ਼ਨ ਕਿਵੇਂ ਹੋਇਆ ਪਰਸਨ ਨਾਲ ਹੋਇਆ ਸਪਰਸ਼ ਹੋਇਆ ਹੱਥ ਦਾ ਉਹਦਾ ਪਰਸ ਹੋਇਆ ਸਵਾਦ ਬਦਲ ਨਾਲ ਸਵਾਦ ਬਦਲਿਆ ਜਾਂ ਦੋ ਆਇਆ ਦੱਸ ਦਰਸ਼ਨ ਪਰਸਨ ਦਰਸ਼ਨ ਦਰਸ਼ਨ ਰਸ ਆਇਆ ਫਿਰ ਦਰਸ਼ਨਾਂ ਤੋਂ ਮੁੰਦੇ ਪ੍ਰਗਟ ਹੋਇਆ ਖੜ ਗਿਆ ਮੁੰਦੇ ਆ ਕੇ ਆਪੇ ਦੱਸ ਤਨਾ ਜੀ ਜੇ ਤੱਕ ਤਾਂ ਮਿੱਠਾ ਹੀ ਲੱਗਦਾ ਪਤਸਾ ਤੇ ਜੀਵ ਨੂੰ ਅਕਲ ਆਤਾ ਹਾਂਜੀ ਇੱਕ ਨਿਰੰਜਨ ਰੱਬ ਰਹਾ ਦੂਆ ਕੁੱਠਾ ਇੱਕ ਨਿਰੰਜਨ ਰੱਬ ਰਹਾ ਇੱਕੋ ਨਿਰੰਜਨ ਸਾਰਿਆਂ ਚ ਰੱਬ ਰਹਾ ਵਾਇਆ ਤੋਂ ਰਹਤ ਹੈ ਜਿਹੜਾ ਨਾਚਣਾ ਇੱਕ ਕਰਨਾ ਲਾ ਰਹਾ ਪਾਉ ਦੂਇਆ ਕੁੱਠਾ ਦੂਜਾ ਜਿਹੜਾ ਪਾਉ ਸੀ ਨਾ ਆਇਆ ਦੀ ਭੁੱਖ ਹਾਂਜੀ ਦੂਜਾ ਪਾਉ ਆਇਆ ਦੀ ਉਹ ਕੁੱਠਾ ਕੁੱਟਾ ਹਲਾਲ ਹੌਲੀ ਹੌਲੀ ਹੌਲੀ ਹੌਲੀ ਹੌਲੀ ਹਲਾਲ ਕਰ ਦੇਣਾ ਇੱਕਦਮ ਛੱਡ ਕੇ ਨਾਲ ਨਹੀਂ ਜਾਂਦਾ ਇਹ ਹਲਾਲ ਕਰੇ ਤੇ ਜਾਂਦਾ ਇਹ ਦੂਜਾ ਪਾਉ ਆ ਇਹ ਕੁੱਠਾ ਹਲਾਲ ਬੋੜਾ ਯਾਨੀ ਬੁਰਾਈ ਥੋੜੀ ਥੋੜੀ ਕਰਕੇ ਛੱਡ ਸਕਦੇ ਆ ਇਕਦਮ ਜਿੱਤ ਪੁੱਛਦਾ ਚਲਮ ਛੱਡ ਕੇ ਰਾਣੀ ਛੁੱਟਦੀ ਹੈ ਬੁਰਾਈ ਜਿਹੜੀਆਂ ਬਾਂਝੜਾ ਪੁੱਛਦਾ ਨਾ ਹਾਂਜੀ ਉਹ ਹੌੜੀ ਹੌੜੀ ਮਾਨ ਹਲਾਲੇ ਹੁੰਦਾ ਉਹਨੇ ਹਲਾਲੇ ਕਰੀਦਾ ਮਾਨਦੂ ਆਖ ਹੋਵੇ ਸੇਖ ਲੋ ਲਬੜ ਕੱਠਾ ਸੇਖ ਕਰੀਦਾ ਜਦੀਰ ਜਿਹੜਾ ਹੈ ਇਹਦਾ ਝਟਕਾ ਕਰੀਦਾ ਇਹ ਹਲਾਲ ਕਰੀਦਾ ਉਹ ਦਾ ਭਾਵ ਨੇ ਸਰੀਰ ਦਾ ਹalal ਸਰੀਰ ਨੂੰ ਹalal ਕਰਨਾ ਕੇ ਬਾਹਰਲੇ ਨੂੰ ਮਨ ਨੂੰ ਜਿਹੜੇ ਆਈ ਦੀ ਉਹਨਾਂ ਮਾਨਾਂ ਨੇ ਮਨ ਨੂੰ ਜਿਹੜੇ ਆਈ ਦੀ ਜਿਹੜਾ ਹalal ਕਰਦਾ ਦੀ ਉਹਨੂੰ ਕੀਤਾ ਨਹੀਂ ਹੈ ਉਹ ਇਹੋ ਕਰਨ ਲੱਗੇ ਅੱਜ ਹੁਣ ਹੁਣ ਆਪਣੇ ਨਾਲ ਨੇੜੇ ਆ ਗਏ ਉਹ ਕਹਿੰਦਾ ਵੀ ਦੱਸਿਆ ਕਰੋ ਕੁਝ ਹੈ ਤੂੰ ਹੀ ਕੋਚ ਲੋ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੈ ਤੁਠਾ ਰਾਤ ਦਾ ਪ੍ਰਭ ਦੇਵੇ ਉੱਠਾ ਪ੍ਰਭ ਜਦ ਨਾ ਨਾ ਫਿਰ ਤੁੱਥ ਕੇ ਰੁੱਧਾ ਪ੍ਰਭ ਦੇਵੇ ਉੱਠਾ ਪ੍ਰਭ ਜਦ ਨਾ ਫਿਰ ਜੀ